ਹਾਂਜੀ ਯਈਏ ਅੱਖਰ ਤੋਂ ਉਪਦੇਸ਼ ਹੈਗਾ जी ਭਗਤ ਕਬੀਰ ਜੀ ਨੇ 16ਵੀਂ ਪੌੜੀ ਚ ਦਿੱਤਾ ਜੀ ਯਈਏ ਅੱਖਰ ਦੀ ਵੀ ਵਰਤੋਂ ਆਮ ਜਿਹੜੀ ਪੰਜਾਬੀ ਇਹਦੇ ਚ ਬਹੁਤ ਘੱਟ ਹੈ ਤੇ ਜਿਹੇ ਅੱਖਰ ਵਰਤੇ ਆ ਜਾਂਦਾ ਹੈ ਤਾਂ ਆਖੀਰ ਚ ਵਰਤਿਆ ਜਾਂਦਾ ਸ਼ੁਰੂ ਚ ਨਹੀਂ ਹਾਂ ਨੇਰੋ ਪਾਇਉਤਾ ਹੈ ਯਾਨੀ ਇਹ ਨਿਕਲਣੇ ਕੱਟ ਰਹੇ ਹੋ ਜਿਹੜਾ ਤੇਰੇ ਹਿਰਦੇ ਦੇ ਅੰਦਰ ਹੈ ਜਿਹੜੇ ਆ ਬਿਲਕੁਲ ਉਹਨੂੰ ਛੱਡ ਕੇ ਬਾਹਰ ਕੀ ਤੂੰ ਟੋਲਦਾ ਫਿਰ ਬਾਹਰ ਕਾਹਦੇ ਜਾਣਾ ਫਿਰ ਜਿਆਦਾ ਸਾਰੇ ਤੈਨੂੰ ਕਹਿਤਾ ਸੀ ਮੰਨ ਲਿਆ ਸੀ ਸਾਰੇ ਕਹਿੰਦੇ ਸੀ ਅੰਦਰ ਹੈ ਤੇਰੇ ਹਿਰਦੇ ਵਿੱਚ ਹੈ ਘਰ ਘਰ ਹੀ ਹੈ ਤੇ ਫਿਰ ਦੂਰ ਕਾਹ ਜਾਣਾ ਆਪਣੇ ਮਨ ਨੂੰ ਕਹਿੰਦਾ ਦੂਰ ਖਾਤ ਆ ਜੇ ਜਾਈ ਉਹਨੂੰ ਛੱਡ ਕੇ ਦੂਰ ਜਾਣ ਦਾ ਕੀ ਫਾਇਦਾ ਕਿਉਂ ਜਾਣੇ ਜੀ ਦੂਰ। ਕਿਆ ਕਾਰਨ ਜਗ ਢੋਲਿਆ? ਇਦੇ ਬਾਅਦ ਤੇ ਜਗ ਢੋਲਿਆ ਸਾਰਾ। ਉਹ ਬਾਹਰ ਦਾ ਮੇਲਿਆ ਨਹੀਂ। ਉਨੇ ਵੀ ਬਹੁਤ ਵੇ ਢੋਲਿਆ ਲੱਗਦਾ। ਬਾਹਰ ਵੀ ਵੀ ਬਾਹਰ ਮੜੂ ਕੋਕੋ। ਉਨੇਓ, ਦੇਰਿਓ ਪਾਇਓ ਤਾਈ। ਮੈਂ ਤਾਂ ਨੇੜੇ ਅੰਦਰੋਂ ਪਾ ਲਿਆ ਭਾਈ। ਇਹਨੇ ਪਾਉਣਾ ਨੇੜੇ ਪਾ ਲੋ ਨਹੀਂ ਪਾਉਣਾ ਤੇ ਰਹੋ ਬਾਹਰੋਂ। ਹਾਂ ਢੋਣਦੇ ਜੋਗੀਆਂ ਨੂੰ ਕਿਹਾ। ਹਾਂ ਦੂਰ ਕਹਾ ਤਜ ਜਾਏ। ਜਾਈ ਰੋ ਬਣ ਇਹਨੂੰ। ਅੱਛਾ ਜੀ ਜਾਈ ਪੜਨਾ ਜੀ ਹਾਂ ਹਾਂ ਅੱਛਾ ਯਈਆਂ ਜਾਈ ਜਾ ਕਾਰਨ ਜਗ ਢੂੰਡਿਓ ਨੇਰਿਓ ਪਾਇਓ ਤਾਂਹੀ ਉਹ ਨੇੜੇ ਵੀ ਪਾ ਲਿਆ ਸੀ ਅੰਦਰ ਵੀ ਪਾ ਲਿਆ ਭਗਤ ਕਬੀਰ ਜੀ ਦਾ ਕੁਝ ਵੀ ਨਾ ਜੀ ਕਬੀਰ ਜਾ ਕੋ ਖੋਜਤੇ ਹਾਂ ਆਇਆ ਸੋਈ ਠੋਰ ਠੋੜ ਕੇ ਤੂੰ ਕਿ ਆਉਂਦਾ ਉੱਥੇ ਕੰਨ ਨੂੰ ਆਪੇ ਹੀ ਅਤੈ ਨੂੰ ਛੋੜਨਾ ਸੀ ਜੀ ਆਖੋ ਕਹਤਾ ਔਰ ਯਹੀ ਅਖਰ ਤੋਂ ਆਸਾ ਮਹੱਲਾ ਪਹਿਲਾ ਪੱਟੀ ਚ ਕੋਈ ਗਣਤੀ ਗਣੋ ਨਾ ਗਣ ਸਕੋ ਊਠ ਸਿਧਾਰੇ ਕੇਤ ਗਿਆਨੋ ਡਿੜ ਸਹੀ ਦਿਨ ਸਜਾਤ ਇਹ ਹੇਤ ਇਹ ਸਹੀ ਮੰਨ ਲੋ ਕਿ ਜਿਹੜਾ ਹੇਤ ਹੈ ਨਾ ਸਾਡਾ ਅਸੀਂ ਬੋਲ ਸਾਰਾ ਨਾਸਵੰਤ ਹੈ ਨਾਸ ਹੋ ਜਾਣਾ ਹੈ ਕਰਕੇ ਬਾਹਰ ਜਿਹੜਾ ਹੇਤ ਲਾਇਆ ਤੁਸੀਂ ਇਹ ਛੱਡ ਤਿਆਗ ਦਿਓ ਇਹਨੂੰ ਪਹਿਲਾਂ ਗਣਤੀ ਗਣੋ ਨਾ ਗਣ ਸਕੋ ਗਲਤੀ ਜੰਦੇ ਆ ਨਾ ਬਾਪੂ ਨੇ ਵੀ ਇੰਨੀ ਮਾਰਾ ਪਾਪ ਹੋ ਗਿਆ ਮੇਤੇ ਉਹ ਸੁਧਾਰੋ ਕੇਤ ਕਿੰਨੇ ਐਡੋ ਮਰ ਕੇ ਚਲੇਗਾ ਜੇ ਗੰਟੀ ਚੱਲੂਗੀ ਲੈਣ ਕਰਮ ਦਾ ਨਾਸ ਇਹ ਕਰਮ ਦਾ ਨਾਸ ਹੋਊਗਾ ਗਿਆਨ ਨਾਲ ਜਾਣ ਲੈ ਲੋ ਕੁਰਬਾਨੀ ਦਾ ਬਸ ਖੁਰਦੂਗਾ ਫਿਰ ਲੇਖਾ ਛੁਰਦੂਗਾ ਜੀ ਸੋ ਬਿੰਸ ਤੋ ਕਾਸੀਓ ਕਰੀਏ ਸੰਗ ਇਸ ਰੀਤੀ ਨੂੰ ਦੇਖਾਂਗੇ ਜੇ ਜਿਹੜੀ ਉੱਤੇ ਦੱਸੀ ਹੋਈ ਆ ਤਾਂ ਬਿੰਦ ਸਤਾਓ ਸਾਰਾ ਬਿੰਦਨ ਆ ਰਿਹਾ ਕੁਛ ਹੈ ਜਿੱਥੇ ਜਿੱਥੇ ਮੋਹ ਹੈ ਜੋਦੀਨ ਆਖਾਂ ਕਰੀਏ ਸੰਗ ਫਿਰ ਦੱਸੋ ਕਿਹਦੇ ਨਾਲ ਸੰਗਤ ਕਰੋਗੇ ਕਿਹਦੇ ਨਾਲ ਜੋੜੋਗੇ ਬਾਹਰ ਤੁਸੀਂ ਬਾਹਰ ਭੁਖੀ ਦ੍ਰਿਸ਼ੀ ਨਾਲ ਕਾਹਦੇ ਨਾਲ ਜੁੜੋਗੇ ਜੋਦੀਨ ਸੇ ਸੋ ਬਿੰਦਨ ਆ ਰਾ ਜੋਦੀਨ ਜੇ ਬਿੰਦਨ ਬਾਹਰ ਜੁੜੇ ਰਹੋ ਆਖਾਂ ਨੂੰ ਜੋਦੀਨ ਹਾਂਜੀ ਗਿਆਨੋ ਇਆ ਬਿਦ ਸਹੀ ਚਿਤ ਝੂਠੋ ਮਾਇਆ ਰੰਗ ਇਹ ਵੀ ਸਹੀ ਆ ਜਾਂ ਸਮਝ ਲਓ ਕਿ ਝੂਠੋ ਮਾਇਆ ਦੇ ਰੰਗਾਂ ਜਿਹੜਾ ਚਿਤ ਲੱਗਿਆ ਹੋਇਆ ਦਾ ਰੰਗ ਝੂਠਾ ਹੈ ਸੋਈ ਸੰਤ ਸੋਏ ਬ੍ਰੰਮ ਤੇ ਕਿੰਚਿਤ ਭਿੰਨ ਅੰਧ ਕੂਪ ਤੇ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਈ ਆਣਾ ਤਾਂ ਸੋਈ ਸੰਤ ਸੋਈ ਜਿਹੜੇ ਇਹ ਗੱਲ ਸਮਝਦਾ ਉਹ ਹੀ ਸੰਤ ਹੈ ਪਰਮਤੈ ਜੀਤ ਤਾਂ ਪਰਮਤੋ ਤੋਂ ਉਹਨੂੰ ਪੈਲਾ ਕਰ ਦੇਵੇ ਇਹ ਪਰਮ ਤੋੜ ਦੇਵੇ ਤੁਹਾਡਾ ਪਰਮ ਤੋੜਨਾ ਕੱਢ ਦੇਵੇ ਜੋ ਬਿੰਦਸਨ ਹਵਾ ਦਾ ਨਾਲ ਨਹੀਂ ਜੁੜਨਾ ਮਾਇਆ ਨਾਲ ਨਹੀਂ ਜੁੜਨਾ ਇਹ ਪਰਮ ਜਿਹੜਾ ਕੱਢ ਦੇਵੇ ਉਹ ਸੰਤ ਹੈ ਅੰਧ ਤੇ ਕੱਢੋ ਜੇ ਹੋਵੇ ਸੋ ਪ੍ਰਸੰਨ ਜੇ ਪ੍ਰਸੰਨ ਹੋ ਜਾਏ ਤਾਂ ਅੰਧ ਤੋਂ ਨਿਕਲਦਾ ਜੇ ਪ੍ਰਪਾਹ ਹੋ ਜਾ ਪਰਮੇਸ਼ਰ ਦੀ ਅਰਮਣ ਕਿਤਨੀ ਹੋ ਜਾ ਇਕਤਾ ਦੋਏ ਪ੍ਰਸੰਨ ਖੁਸ਼ ਹੋਣ ਤਾਂ ਨਿਕਲਦੇ ਨੇ ਅੰਧਕੂਪ ਤੇ ਵੱਧਣ ਨਿਕਲਦੇ ਨਹੀਂ ਜੇ ਮਾਇਆ ਨੂੰ ਤਿਆਗਣਾ ਮੰਨ ਲੈਣੇ ਸਤਾਰ ਮੰਨ ਹੋ ਗਏ ਬਾਦੂਪ ਤੇ ਨਿਕਲਦੇ ਨਹੀਂ ਬਦਲ ਨਹੀਂ ਨਿਕਲਦੇ ਜਿੰਨੇ ਕਰ ਇਤਨੀ ਮੰਨਦਾ ਉਹ ਨજર ਵੀ ਨਹੀਂ ਦਿਖਦਾ ਸੋਈ ਸੰਤ ਸੋਏ ਜੱਜੇ ਦੀ ਸੰਸ ਆਉਂਦਾ ਹੈ ਉਹ ਨੰਨੇ ਦੀ ਚੌਂਦਾ ਸੀ ਜੱਜੇ ਦੀ ਚੌਂਦਾ ਹੈ ਜੀ ਹਾਂ ਜੀ ਹਾਂ ਜੀ ਜਾਣਤ ਸੋਈ ਸੰਤ ਸੋਏ ਪ੍ਰਮਤਿ ਇਛਤ ਭਿੰਨ ਅੰਦ ਰੂਪ ਤੇ ਕੱਢੋ ਜੇ ਹੋਵੇ ਕੀ ਭਾਵ ਹੁੰਦਾ ਜੀ ਜਦ ਜੇ ਪ੍ਰਸੰਨ ਹੋਵੇ ਨਿਕਲ ਵਾਸਤੇ ਮਾਇਆ ਚੋਂ ਜਿਹਨੇ ਜੋੜਿਆ ਉਹੀ ਕੱਢੂਗਾ ਜਿਹਦੇ ਤੈਨੂੰ ਕਿਹਾ ਜੁੜ ਜਾ ਮਾਇਆ ਨਾਲ ਉਹੀ ਕੱਢੂਗਾ ਅਸਲ ਚ ਉਹਨੂੰ ਬੇਨਤੀ ਕਰ ਯਾ ਕੇ ਹਾਥ ਸਮਰੱਥ ਤੇ ਕਾਰਨ ਜੋਗ ਨਾਨਕ ਤੈ ਉਸਤਤ ਕਰੋ ਯਾ ਹੂ ਕਿਉ ਸੰਜੋਗ ਯਾ ਹੂ ਕਿਉ ਸੰਜੋਗ ਜੱਜੇ ਦੇ ਨਾਲ ਜਦ ਹੁੰਦਾ ਨਾ ਲਾ ਕੇ ਜਿਹੜੀ ਬਿੰਦੀ ਲਗਣੀ ਬਿੰਦੀ ਵਿੱਚ ਸਮਝ ਲਓ ਹਾਂ ਬਿੰਦੀ ਵਾਲਾ ਅੱਖਰ ਹੈ ਜੀ ਬਿੰਦੀ ਲਗਣੀ ਨਹੀਂ ਹੈ ਕਿਉਂਕਿ ਇਹ ਇਹ ਜੱਜੇ ਨੂੰ ਬਿੰਦੀ ਲੱਗੇ ਆਵਾਜ਼ ਹਾਂਜੀ ਯਾ ਕੇ ਹਾਥ ਸਮਰੱਥ ਤੇ ਕਾਰਨ ਕਰਨੇ ਜੋ ਜਿਹਦੇ ਜਿਹਦਾ ਸਮਰੱਥ ਹੈ ਨਾ ਜਿਹਦਾ ਹੱਥ ਸਮਰੱਥ ਹੈ ਜਿਹਦੇ ਹੱਥ 'ਚ ਪਾਵਰ ਹੈ ਸਭ ਕੁਝ ਕਰ ਸਕਦਾ ਜਿੱਲੀ ਮੁਠੀ ਸ਼ਕਤੀ ਹੈ ਕਰਨ ਦੀ ਸਮਰੱਥਾ ਨਾਨਕ ਤੇ ਉਸਤਤ ਕਰੋ ਕਰੋ ਜਿਹੜਾ ਧੰਨਵਾਤ ਹੈ ਸਮਰੱਥ ਗੁਰੂ ਹੈ ਸਮਰੱਥ ਕੌਣ ਗੁਰੂ ਸਮਰੱਥ ਗੁਰੂ ਫਿਰ ਹਟਾ ਤਰਿਓ ਤੇ ਉੱਥੇ ਦੀ ਕਰੋ ਜਾਂ ਜਿਹੋ ਸੰਗ ਉਹਨੇ ਸੰਗ ਬਣਾਇਆ ਉਹਨੇ ਸਾਨੂੰ ਜਨਮ ਦਿੱਤਾ ਉਦੋਂ ਹੀ ਗੁਰੂ ਦਾ ਗਿਆਨ ਪ੍ਰਗਟ ਕੀਤਾ ਤਾਂ ਸਾਨੂੰ ਮੁੜ ਗਿਆ ਜੇ ਹੈ ਨਹੀਂ ਸੀ ਇੱਥੇ ਬਹੁਤ ਸਮਾਂ ਸੀ ਤੇ ਪ੍ਰਸਾਦ ਨਹੀਂ ਸੀ ਹੁੰਦੀ ਜਿਹੜਾ ਬਰਸਾਦ ਦੇ ਵਿੱਚ ਜਿਹੜੇ ਬਰਸਾਦ ਬਾਅਦ ਜੰਮੇ ਨੇ ਕਿਹਾ ਬਰਸਾਦ ਬੰਦ ਹੋ ਗਈ ਕੋਈ ਵੀ ਪੈਦਾ ਹੋ ਸਕਦਾ ਹੈ ਨੂੰ ਪੈਦਾ ਹੋਣਗੇ ਠੀਕ ਹੈ ਜੀ ਕਹਿਣ ਦਾ ਭਾਵ ਹੈ ਵੀ ਚਿੱਤ ਨੂੰ ਮਾਇਆ ਦੇ ਰੰਗ ਚੋਂ ਦੂਰ ਰੱਖਣਾ ਹੈ ਬਿਲਕੁਲ ਤੁਹਾਡੇ ਨੈਗੇਟਿਵ ਬਸਿਆ ਹੋਇਆ ਮਨ ਦੇ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ 26ਵੀਂ ਪੌੜੀ ਦਾ ਉਪਦੇਸ਼ ਹੈ ਜੀ ਇੱਥੇ ਯਹੀ ਅਖਰ ਦਾ ਉਪਦੇਸ਼ ਸਮਾਪਤ ਹੈ ਜੀ